लोक महला चौथा अंतर ज्ञान भई मत मद्दम की परतीत नाही अंदर कपट सब कपटो कर जाना कपते खपे खपाई अंदर अज्ञान अज्ञानता है अंदर अंधेरा है अंदर धर्मदा अंधेरा हुंदा जितना कि अज्ञानता अंदर है ही है, अंदर हैगा है, उन्नाचर मत भी मद्दम है ਉਹ ਗਿਆਨ ਤਾਂ ਨਾ ਮਤਮਦਮ ਕਰਤੀ ਸ਼ੀਸ਼ਾ ਜਿਹੜਾ ਹੈਗਾ ਨਾ ਮਲੀਨ ਕਰਤਾ ਹੋ ਬਿਵੇਗਵੁੱਧ ਮਲੀਨ ਕਰਤੀ ਫਈ ਮਤ ਮਦਮ ਸਤਗੁਰ ਕੀ ਪ੍ਰਤੀਤ ਨਹੀਂ ਗੁਰਬਾਣੀ ਤੇ ਭਰੋਸਾ ਕਿਵੇਂ ਹੋਵੇ ਮਤ ਤਾਂ ਮਦਮ ਜਿਹੜੀ ਸਤਗੁਰ ਦੀ ਬਾਣੀ ਹੈ ਤੇ ਭਰੋਸਾ ਨਹੀਂ ਹੈਗਾ ਪ੍ਰਤੀਤ ਨਹੀਂ ਅੰਦਰ ਕਪਟ ਸਭ ਕਪਟੋ ਕਰ ਜਾਣੇ ਆਪਣੇ ਅੰਦਰ ਕਪਟ ਹੈ ਇਸ ਕਰਕੇ ਸਾਰਿਆਂ ਦੇ ਅੰਦਰ ਕਪਟ ਮੰਨੀ ਬੈਠਾ ਹੈ ਦੇ ਅੰਦਰ ਨਹੀਂ ਕਪਟ ਹੁੰਦਾ ਕਿਉਂਕਿ ਆਪਣੇ ਅੰਦਰ ਕਪਟ ਹੈ ਸਾਰਿਆਂ ਨੂੰ ਇਹ ਕਪਟੀ ਮੰਨਦਾ ਕਪਟੋ ਕਲ ਜਾਣਾ ਕਪਟੇ ਸਪੇ ਖਪਾਈ ਬਸ ਕਪਟੇ ਖਬੀ ਜਾਂਦਾ ਇਹ ਕਪਟੇ ਤੈਨੂੰ ਗਿਆਨ ਪੈਦਾ ਹੀ ਨਹੀਂ ਗੁਰਬਾਣੀ ਤੇ ਭਰੋਸਾ ਨਹੀਂ ਕਰਦਾ ਤਰੋਤਾ ਨਹੀਂ ਕਰਦਾ ਤੇ ਫਿਰ ਅੰਦਰ ਚੱਲਣ ਨਹੀਂ ਹੁੰਦਾ ਉਹਦਾ ਅਸਰ ਨਹੀਂ ਹੁੰਦਾ ਹਾਂਜੀ ਸਤਗੁਰ ਕਾ ਬਾਣਾ ਚਿੱਤ ਨਾ ਆਪਣੇ ਸਵਾਏ ਫਿਰਾਹੀ ਸਤਗੁਰ ਦਾ ਬਾਣਾ ਤਾਂ ਚਿੱਤ 'ਚ ਆਉਂਦਾ ਹੀ ਨਹੀਂ ਸਤਗੁਰ ਦਾ ਬਾਣਾ ਤਾਂ ਮੰਨਣਾ ਚਾਉਂਦਾ ਹੀ ਨਹੀਂ ਵੀ ਵਕਾ ਹੀ ਬਾਣੇ ਤਾਂ ਆਉਣ ਦੀ ਸਵਾਰਥ ਵਾਸਤੇ ਹੀ ਰਹਿੰਦਾ ਮਨ ਉਦਰੇ ਸੁਰਤ ਦੌੜ ਰਹਿੰਦੀ ਹੈ ਧਿਆਨ ਆਪਣੇ ਸਵਾਰਥ ਵਾਸਤੇ ਭੱਜਿਆ ਫਿਰਦਾ ਰਹਿੰਦਾ ਹੈ ਹਾਂਜੀ ਕਿਰਪਾ ਕਰੇ ਜੇ ਆਪਣੀ ਨਾਨਕ ਸ਼ਬਦ ਸਮਾਹੀ ਜੇ ਕਿਰਪਾ ਕਰੇ ਜੇ ਆਪਣੀ ਪਿਤਾ ਪਰਮੇਸ਼ਰ ਦੀ ਕਿਰਪਾ ਹੋਵੇ ਕੋਤੋਂ ਆਪਣੀ ਵੀ ਆਪਣੇ ਤੇ ਕਿਰਪਾ ਕਰਦਾ ਸੋਣਾ ਮੰਨ ਲੈ ਮੰਨਣੇ ਤੇ ਬਿਨਾਂ ਗੱਲ ਨਹੀਂ ਬਣਨੀ ਕਿਰਪਾ ਕਰੇ ਜੇ ਆਪਣੂ ਕਰੇ ਨਹੀਂ ਆਪਣੀ ਕਿਰਪਾ ਕਰ ਲੈ ਮੰਨ ਲੈ ਗੁਰੂ ਕੀ ਗੱਲ ਤੇਰੇ ਮੰਨੇ ਬਿਨਾ ਗੱਲ ਨਹੀਂ ਚੱਲਣੀ ਹੁਣ ਤੇ ਹੁਣ ਕਿਸੇ ਦੀ ਕਿਰਪਾ ਨਾਲ ਤਾਂ ਤੂੰ ਬਣ ਨਹੀਂ ਸਕਦਾ ਉਹਨੇ ਤਾਂ ਕਿਰਪਾ ਕਰਨੀ ਪਈ ਤੈਨੂੰ ਗੁਰਬਾਨੀ ਦੇਤੀ ਥੋਣ ਨੂੰ ਗੁਰਬਾਨੀ ਦੇਤੀ ਸਤਗੁਰ ਸਮਝਾਉਣ ਨੂੰ ਦੇਤਾ ਕੁਤੂ ਮਨਰਾਨੀ ਨੀ ਤੇਰੀਓ ਤੇਰੇ ਤੇ ਕਿਰਪਾ ਨਹੀਂ ਹੈ ਹੋਰ ਤਾਂ ਕਿਸੇ ਦਾ ਕੋਈ ਤੂ ਹੋਰ ਨਹੀਂ ਵਿੱਚ ਆ ਜਿਹੜੀ ਕਿਰਪਾ ਕਰਨ ਜੇ ਆਪਣੀ ਅਸੀਂ ਪਰਮੇਸ਼ਰ ਤੇ ਆਪਣਾ ਕੋਹੂ ਨਹੀਂ ਨਾ ਆਪਣੇ ਕੋਹੂ ਤੋਂ ਭਰੀ ਆਪਣੀ ਗਲਤੀ ਨਹੀਂ ਮੰਨੀ ਹੈ ਪਰਮੇਸ਼ਰ ਵੱਲੋਂ ਢਾਲਦੀ ਗੱਲ ਇਹ ਆਪਣੀ ਕਿਰਪਾ ਆਪਣੇ ਤੇ ਕਰ ਲੈ ਮਨ ਲਾ ਬਾਣੀ ਗੁਰ ਤੇ ਸਤਿਗੁਰ ਤੇ ਭਰੋਸਾ ਕਰ ਲੈ ਫਿਰ ਤੂੰ ਗੁਰ ਕੇ ਸ਼ਬਦ ਸਮਾਹ ਸਕਦਾ ਨਾਮ ਸ਼ਬਦ ਸਮਾਹੇ ਜਬਦ ਗੁਰੂ ਜੀ ਸਿਖਤ ਮਾਜੇਗਾ ਹਾਂਜੀ ਮਹੱਲਾ ਚੌਥਾ ਮਨਮੁਖ ਮਾਇਆ ਮੋਹ ਵਿਆਪੈ ਦੂਜੇ ਭਾਏ ਮਨੁਆਥੇ ਨਾਹਿ ਅਨ ਦਿਨ ਜਲਤ ਰਹੈ ਦਿਨ ਰਾਤੀ ਹੋਮੈ ਖਪੈ ਖਪਾਏ ਮਨੋ ਕਜੜਾ ਹੈਗਾ ਮਾਇਆ ਮੋਹ ਵਿਆਪਾ ਉਹਦੇ ਅੰਦਰ ਮਾਇਆ ਦਾ ਮੋਹ ਵੱਧਾ ਰਹਿੰਦਾ ਹੈ ਉਦੀ ਜਾਂਦਾ ਗੰਗੁਣਾ ਰਾਜ ਦੂਜੇ ਭਾਏ ਮਨੁਆਥੇ ਜਿੰਨਾ ਜਦ ਭੁੱਖ ਮਾਇਆ ਦੀ ਹੈ ਦੂਜਾ ਭਾਇਆ ਹੈ ਨਾ ਮਾਇਆ ਦੀ ਭੁੱਖ ਦੂਜੀ ਮਾਇਆ ਹੀ ਹੈ ਸੰਸਾਰ ਚ ਉਹਨਾਂ ਜਰ ਮਨ ਠਹਿਰ ਨਹੀਂ ਸਕਦਾ ਮਨ ਤੇ ਟਿਕਾ ਨਹੀਂ ਆ ਸਕਦਾ ਹੋਂ ਨਹੀਂ ਠਹਿਰ ਸਕਦਾ ਜਲਤ ਰਹਾ ਦੇ ਨਰਾਤੀ ਹੋਂ ਮੇ ਤੇ ਹੋਂ ਦੇ ਵਿੱਚ ਖਪਦਾ ਖਪੌਣਾ ਰਹਿੰਦਾ ਮੈਂ ਐ ਕਰ ਮੈਂ ਆਹ ਕਰ ਸਕਦਾ ਮੈਂ ਉਹ ਕਰ ਸਕਦਾ ਇਹੀ ਹੋਂ ਆਪਣੇ ਭਾਵੇਂ ਚ ਭੱਜਿਆ ਫਰੀ ਜਾਂਦਾ ਰਿਜ਼ਲਟ ਕੁਝ ਵੀ ਨਹੀਂ ਨਿਕਲਦਾ ਐਵੇਂ ਖਪਦਾ ਰਹਿੰਦਾ ਹੁੰਦਾ ਹੋਈ ਹੈ ਜੋ ਉਹ ਚਾਹੁੰਦਾ ਸੋਚਾਂ ਦੇ ਵਿੱਚ ਸੋਚ ਦਾ ਬਹੁਤ ਕੁਝ ਰਹਿੰਦਾ ਜਦੋਂ ਇਹਨੇ ਸੋਚਿਆ ਮੁਕਾ ਨਹੀਂ ਨਾ ਫਿਰ ਫਿਰ ਬੜਾ ਤੋਂ ਖੁੱਲਦਾ ਇਹਨੂੰ ਸਾਡਾ ਸੋਚਿਆ ਹੈ ਜਾਂ ਹੁੰਦਾ ਨਹੀਂ ਸਾਨੂੰ ਮਾਇਆ ਦੀ ਤ੍ਰਿਸ਼ਨਾ ਦੀ ਅੱਗ ਜਲਦਾ ਰਹਿੰਦਾ ਖਪਦਾ ਖਪਉਂਦਾ ਰਹਿੰਦਾ ਨਠਿਆ ਭੱਜਿਆ ਫਰੀ ਜਾਂਦਾ ਜਲਤ ਤਾਂ ਨਿਕਲਦਾ ਜੋ ਚਾਹੁੰਦਾ ਹੁੰਦਾ ਹੋਈ ਹੈ ਜੋ ਹੋ ਚਾਹੁੰਦਾ ਹਾਂਜੀ ਅੰਤਰ ਲੋਭ महा गुबारा तिनके निकट ना कोई जाहि कोई आप दुखी सुख कभु ना पावे जन्म मरै मर जा अंतर् लोभ जिन्ना जे लोभ अंदर है ओना जड़ा ज्ञानता भी भगवा रे रहने अंदर अज्ञानता करके लोभ है लोभ करके ਗੁਰਬਾਣੀ ਦਾ ਕੋਈ ਇਲਾਜ ਨਹੀਂ ਕਰ ਸਕਦੀ ਲੋਭੀ ਦਾ ਵਿਸਾਹ ਕਹਿੰਦੇ ਨਹੀਂਗਾ ਲੋਭੀ ਕਾ ਪਸੰਦ ਕੀਜੇ ਲੋਭੀ ਕਿਸੇ ਦਾ ਇਤਵਾਲ ਨਹੀਂ ਕਰਦਾ ਇਸ ਕਰਕੇ ਗੁਰਬਾਣੀ ਦੇ ਇਤਵਾਲ ਨਹੀਂ ਕਰਦਾ ਇਸ ਕਰਕੇ ਉਹਨੂੰ ਕੋਈ ਦਵਾਈ ਲੱਗਦੀ ਹੋਈ ਨਹੀਂ ਉਹਦੇ ਅੰਦਰ ਉਹ ਅਗਿਆਨਤਾ ਚਾਏ ਨਹੀਂ ਸਕਦੀ ਓਏ ਆਪ ਦੁਖੀ ਸੁੱਖ ਕਦੋਂ ਹੋਣਾ ਉਹ ਆਪ ਤਾਂ ਦੁਖੀ ਰਹਿੰਦੇ ਨੇ ਕਦੇ ਵੀ ਸੁੱਖ ਨਹੀਂ ਹੋ ਸਕਦਾ ਉਹ ਆਪ ਦੁਖੀ ਸੁੱਖ ਕਦੋਂ ਨਾ ਪਾਵੇ ਜਨਮ ਮਰਨ ਮਰ ਜਾਹੀ ਜਨਮ ਦੇ ਮਰਦੇ ਰਹਿੰਦੇ ਨੇ ਤੋ ਕੋ ਨਹੀਂ ਮਿਲ ਸਕਦਾ ਉਹਨਾਂ ਨੂੰ ਦੁੱਖ ਹੀ ਮਿਲਦੇ ਰਹਿੰਦੇ ਨੇ ਹਾਂਜੀ ਨਾਨਕ ਬਖਸ਼ ਲਏ ਪ੍ਰਭ ਸਾਚਾ ਤੇ ਗੁਰ ਚਰਣੀ ਚਿਤਲਾਹ ਨਾਨਕ ਕਹਿੰਦਾ ਇਹ ਬਖਸ਼ ਹੋ ਜਾਏ ਪ੍ਰਭ ਸਾਚੇ ਦੀ ਉਹਨਾਂ ਦਾ ਗੁਰ ਚਰਣੀ ਕਿੱਥੇ ਲੱਗ ਜਾਂਦਾ ਹੈ ਜੇ ਬਖਸ਼ ਹੋ ਜਾਏ ਤਾਂ ਗੁਰ ਫਰ ਹੋਵੇ ਕੋਈ ਭਗਤ ਹੋਵੇ ਪ੍ਰਵਾਨ ਦਰਗਾਹ ਚ ਉਹ ਹੈ ਜਿਹਨੂੰ ਪ੍ਰਭ ਦਾ ਪਾਣਾ ਮਿੱਠਾ ਲੱਗੇ ਜੇ ਪ੍ਰਭ ਦਾ ਪਾਣਾ ਨਹੀਂ ਨਾ ਮਿੱਠਾ ਲੱਗਦਾ ਤਾਂ ਪ੍ਰਭ ਦਾ ਪਾਣਾ ਮਿੱਠਾ ਲੱਗਣ ਹੈ ਗੁਰਕਾ ਉਹ ਪ੍ਰਵਾਨ ਦਰਗਾਹ ਚ ਸਹੀ ਵਿਚਖਣ ਜੰਤ ਹਰ ਤੇ ਆਇਆ ਉਹ ਜਿਨ੍ਹਾਂ ਨੇ ਹਲ ਦੇ ਵਿੱਚ ਧਿਆਨ ਰੱਖਿਆ ਉਹਨਾਂ ਨੂੰ ਨਾਮ ਦਾ ਰਸ ਆਇਆ ਉਹਨਾਂ ਨੇ ਨਾਮ ਦਾ ਰਸ ਚਖਿਆ ਬਾਕੀ ਕਿਸੇ ਨੂੰ ਨਾਮ ਦਾ ਸਵਾਦ ਇਹ ਨਹੀਂ ਤੇ ਇੱਥੇ ਸੰਤ ਤੇ ਭਗਤ ਦੋਹੇ ਹੀ ਕਿ ਸਤਿਖੰਡ ਵਿੱਚ ਬਹੁ ਗਿਣਤੀ ਭਗਤਾਂ ਔਰ ਸੰਤ ਬਹੁ ਗਿਣਤੀ ਹੈ ਉੱਥੇ ਕਦੇ ਇੱਕ ਹੈ ਠੀਕ ਹੈ ਜੀ ਸੰਤ ਭਗਤ ਪਰਵਾਨ ਜੋ ਪ੍ਰਭ ਭਾਇਆ ਸੇਈ ਵਿਚਖਣ ਜੰਤ ਜਿੰਨੀ ਹਰ ਤੇ ਆਇਆ ਜਿਹੜਾ ਨੇ ਹਰ ਤੇ ਅਨੁੱਖਿਆ ਉਹਨਾਂ ਨੂੰ ਨਾਮ ਦਾ ਸਵਾਦ ਆਇਆ ਉਹਨਾਂ ਨੇ ਚਖਿਆ ਰਸ ਕੀ ਜੀ ਵਿੱਚ ਅੱਛਾ ਤਾਂ ਆਪਾਂ ਕੀ ਭਾਵ ਲੈਣੇ ਆ ਜੀ ਚਖਾ ਨਾਮ ਨਿਧਾਨ ਭੋਜਨ ਖਾਇਆ ਸੰਤ ਜਨਾ ਕੀ ਧੂਰ ਮਸਤਕ ਲਾਇਆ ਅੰਮ੍ਰਿਤ ਨਾਮ ਲਗਾ ਲੈ ਭੋਜਨ ਖਾਦਣਾ ਲੈ ਹੋਵੇ ਸਰੀਰ ਦਾ ਨਹੀਂ ਇੱਥੇ ਹੈਗਾ ਇੱਥੇ ਆਤਮਿਕ ਖੁਰਾਕ ਦੀ ਗੱਲ ਹੈ ਅੰਮ੍ਰਿਤ ਨਾਮ ਲੈ ਭੋਜਨ ਖਾਇਆ ਬਸ ਆਹੀ ਭੋਜਨ ਸਾਧਾ ਉਹਨਾਂ ਨੇ ਦੂਆ ਭੋਜਨ ਸਰੀਰ ਨੇ ਖਾਦਾ ਹੋਊਗਾ ਉਹ ਨਾਲ ਨਹੀਂ ਖਾਦਾ ਮਾਇਆ ਦਾ ਸਰੀਰ ਮਾਇਆ ਦਾ ਭੋਜਨ ਖਾਊਗਾ ਜਿਹੜਾ ਦੂਆ ਸੰਤ ਜਨਾ ਕੀ ਢੂਰੀ ਮਸਤਕ ਲਾਇਆ ਸੰਤ ਜਨਾ ਉਹ ਜਿਹੜੀ ਢੂਰੀ ਹੈ ਜੋ ਸੰਤ ਜਨਾ ਦੇ ਬਚਨ ਨੇ ਉਹਦੇ ਵਿੱਚ ਜੋ ਗਿਆਨ ਹੈ ਉਹ ਮੱਥੇ ਤੇ ਲਾਉਂਦੇ ਨੇ ਉਹਦੇ ਦਾ ਮੂੰਹ ਜਿਹੜਾ ਹੈਗਾ ਕਾਲਾ ਜਿਹੜਾ ਹੈ ਉਹ ਕਰ ਲੈਂਦੇ ਨੇ ਉਹ ਦੂਰ ਕਰ ਲੈਂਦੇ ਨੇ ਮਨ ਰੂਪੀ ਸ਼ੀਸ਼ਾ ਸਾਫ ਹੋ ਜਾਂਦਾ ਨਾਨਕ ਭਏ ਪੁਨੀਤ ਹਰ ਤੀਰਥ ਨਾ ਆਇਆ ਬਸ ਇਹ ਨਾਮ ਦਾ ਤੀਰਥ ਹੈ ਇਹ ਪੁਨੀਤ ਪਵਿੱਤਰ ਨਹੀਂ ਕਰਦਾ ਪੁਨੀਤ ਕਰ ਦਿੰਦਾ ਹੈ ਨਾਲਕ ਭਾਏ ਪੁਨੀਤ ਹਰ ਤੀਰਥ ਨਾ ਆਇਆ ਇਹ ਤੇ ਹੋ ਜਾਂਦਾ ਸਾਰੀ ਉਹ ਲੈ ਕੇ ਪੁਨੀਤ ਹੁੰਦਾ ਫਿਰ ਮਾਇਆ ਲੱਗਦੀ ਹੋਈ ਨਹੀਂ ਐਸਾ ਗਿਆਨ ਮਿਲਦਾ ਫਿਰ ਮਾਇਆ ਵੱਲ ਉਹ ਝਾਕਦਾ ਹੀ ਨਹੀਂ ਮਾਇਆ ਦੀ ਇੱਛਾ ਹੀ ਨਹੀਂ ਪੈਦਾ ਹੁੰਦੀ ਹਾਂਜੀ ਇੱਥੇ 26ਵੀਂ ਫੌੜੀ ਸਮਾਪਤੀ ਹੈ ਜੀ ਜੀ